ਜੋ ਲੋਕ ਮਹੱਲਾ ਜਿ ਆਵਾ ਸੇਜਨ ਸਦਾ ਕਰਨ ਜਿੰਨ ਕੋ ਆਪੇ ਦੇਵ ਬੁਝਾਏ ਵਾਵਾ ਕਰਤਿਆਂ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾਵਾ ਤੇਜਨ ਸਦਾ ਕਰਨ ਹਾਂਜੀ ਜੇ ਕੋ ਆਪੇ ਦੇਵ ਬੁਝਾਏ ਜਿਹੜੇ ਬੁੱਝ ਲੈਦੇ ਨੇ ਉਹਨਾਂ ਨੇ ਵਾਵਾ ਕਰਦੀ ਹੋਰ ਵਿਚਾਰੇ ਕੀ ਕਰਦਗੇ ਜਿਹਨਾਂ ਆਪੇ ਦੇ ਬੁਝਾਇਆ ਹੈ ਜਿਹਨਾਂ ਨੂੰ ਆਪੇ ਕੁਝ ਬੁਝ ਲੈਣ ਕਰੇ ਇਹਦੇ ਬਾਲਾ ਕਲਪ ਦੇ ਵਿੱਚ ਕੀ ਹੈ ਉਹ ਨਾਸ਼ੀ ਰਾਜ ਜਾਣਾ ਸਾਰੇ ਮਸਲੇ ਹੱਲ ਹੋ ਜਾਣਗੇ ਹਾਂਜੀ ਜਿਹੜੇ ਗੱਲ ਬੁਝ ਲੈਦੇ ਨੇ ਵਾ ਵਾ ਉਹ ਕਰਦੇ ਨੇ ਸੱਚੀ ਗੁਰਬਾਣੀ ਉਹ ਗਾਉਂਦੇ ਨੇ ਉਹਨਾਂ ਦੀ ਰਾਈ ਹੈ ਤੇ ਕਿਆ ਨਾਮ ਦੇ ਬਗਾਉਂਦਾ ਬੈੜੀ ਬੈੜੀ ਲਕੀ ਅਥਾਹ ਦਾਲ ਬਜਾਉਂਦਾ ਸੱਜਣ ਲੱਗੇ ਨੇ ਅੰਦਰ ਆ ਰਾਮਨਾ ਸ਼ੋਰ ਨੂੰ ਸਰੀਰ ਕਰ ਜਾਏ ਸਰੀਰ ਚਲੇ ਪੈ ਚਲੇ ਜਾਵੇ ਆਰਾਮ ਨਹੀਂ ਛੜਦਾ ਉਹ ਗਉਂਦੇ ਨੇ ਹਰੇਕ ਦੀ ਗਉਂਦਾ ਇੱਕ ਘੁਰਕੀ ਵਾਹ ਵਾਹ ਕਰਤੇ ਉਹ ਨਰਮੇ ਨਰਮਾਗਮ ਹੁੰਦਾ ਉਹ ਬਈ ਨਾ ਨਾ ਬਰੋਦਾ 2200 ਬਸੇਕਤ ਹੋਈ ਕਿ ਕਰਨ ਵਾਲੇ ਹੁੰਦਾ ਗੁਣ ਕਰਨਾ ਗੁਣ ਗਾਣਾ ਹੈ ਪਰਮੇਸ਼ਰ ਦਾ ਗੁਣ ਗਾਏ ਨਹੀਂ ਹੈ ਠੀਕ ਹੈ ਗੁਣ ਨਰਮਲ ਹੋਊਗਾ ਕੋਣੇ ਧਰਮਲ ਹੋਏ ਕੋਣ ਗਾਵਤ ਤੇਰੀ ਉਤਰਸ ਲੈ ਬਿਨਸ ਜਾਏ ਹਉਦੇ ਫੈਲ ਉਹ ਜਿਹੜੀ ਵਿਖਿਆ ਫੈਲੀ ਹੋਈ ਹੈ ਨਾ ਜ਼ਹਿਰ ਫੈਲੀ ਹੋਈ ਹੈ ਹਉਬੇ ਦੀ ਉਹ ਕਹਿੰਦੇ ਆਪੀ ਉਤਰ ਜਾਂਦੀ ਹੈ ਉਤਰੀ ਜਾਂਦੀ ਹੈ ਹੋਰ ਜੋੜੀ ਵਾਹ ਮੂੰਹ ਤੋਂ ਵਾਹ ਕਹੀ ਜਾਣਾ ਪਰ ਵਾਹ ਵਾਹ ਮਨਚੇ ਤੇ ਸਮਝਣਾ ਤਾਂ ਇਹਨੂੰ ਅਪਣਾਉਣਾ ਹੈ ਜੀ ਉਹ ਆਜ ਨਾਲ ਕੀ ਬਾਤ ਆ ਗੱਲ ਤੋਂ ਉੱਤੇ ਦੇਖੋ ਦੋ ਕਿਸਮ ਦੀ ਗੱਲ ਹੈ ਦੁਨੀਆਂ ਉਸੇ ਮੇਰਾ ਠਾਠਾ ਬੱਗਾ ਆ ਗੱਲ ਤੇ ਉੱਤੇ ਉੱਤੇ ਨਹੀਂ ਜਿਹੜੀ ਦੁਨੀਆਂ ਦੁਹੋਂ ਦਾਤਰ ਦੁਨੀਆਂ ਦੁਹੋਂ ਦਾਤਰ ਹੈ ਅਸੀਂ ਭਗਤੀ ਕਰਦੇ ਹਾਂ ਜਿਹਦਾ ਰਾਮ ਨਾਮ ਜਦ ਹਿਰਦੇ ਮੇਂ ਨਾਨਕ ਪੱਥੇ ਨਹੀਂ ਕਰ ਜਾਏ ਹੈ ਜੇ ਬਾਹਰ ਨਾ ਗਿਆ ਨਾਮ ਰੂਦਰ ਜਾਬ ਗੋਤਲ ਸੰਤਨ ਸਿੰਘ ਸੰਤਨ ਸਿੰਘ ਮੇਰੀ ਲੇਵਾ ਦੇਵੀ ਸੰਤਨ ਸਿੰਘ ਬਿਹਾਰਾ ਸੰਤਨ ਮੋਹ ਕੋ ਕੂਟੀ ਸੋਪੀ ਜਾਣ ਅਪਰਤ ਭਰੇ ਪੜਾਣਾ ਸੰਤਨ ਮੋਹ ਕੋ ਕੂਟੀ ਧੋਖਾ ਕਰਮਾ ਜਬ ਕਾ ਕਰੇ ਕੋ ਜੋ ਲੇਖਾ ਲੇਖਾ ਪਾਣਦਾ ਜਿਹੜਾ ਵਾ ਵਾ ਅੰਦਰ ਕਰਦਾ ਇੱਕ ਵੰਨ ਕਿੱਤ ਹੋਵੇ ਕਰਦਾ ਉਹਦਾ ਦੇ ਦੇਣਾ ਮੈਂ ਕੋਈ ਠੀਕ ਹੈ ਜੀ ਉਹ ਤਾਂ ਲੋਕ ਦਾ ਹਾਵ ਹੈ ਇਹ ਤਾਂ ਲੋਕ ਦਾ ਹਾਵ ਹੈ ਠੀਕ ਹੈ ਜੀ ਉਹ ਤਾਂ ਫਿਰ ਵੀ ਆਇਆ ਮਾਲ ਫਿਰ ਵੀ ਆਇਆ ਬਹੁਤ ਹਫਤਾਲੀ ਹੋ ਗਿਆ ਤੇ ਦੁਨੀਆ ਜਿੱਤ ਨਹੀਂ ਪਰਮੇਸ਼ਰ ਜਿਆਨੂ ਕਿਹਾ ਹੈ ਗੱਲ ਸੁਣ ਲੈ ਮੈਂ ਕਾਰ ਪ੍ਰਿਹਾਰੀਆਂ ਕਰਦਾ ਕਰਦਾ ਤੂੰ ਵੱਡਾ ਵੱਡਾ ਅਯੂਧੀ ਵਗੈਰਾ ਸਰਬੋਤਮ ਆਇਆ ਹੋਇਆ ਨੇ ਉਦੋਂ ਜਦ ਆੜਿਆ ਇੱਕ ਬਰੇਤੀ ਰਾਜਾ ਬਣ ਕੇ ਨਾ ਕੰਨ ਗੋਲਦੇ ਕੰਨ ਜਿ ਵੜ ਗਿਆ ਕਲਪ ਤਲਪ ਕੇ ਜੀੜੇ ਨਾਲੇ ਮਰ ਗਿਆ ਉਹ ਛਟਕਦਾ ਇਸ ਤਰ੍ਹਾਂ ਜਾ ਕੇ ਤਸਾ ਉਹ ਜਦ ਛਟਕਦਾ ਛੜਦਾ ਹੀ ਮਿਰ ਮਰ ਗਿਆ ਟਿਕਣਾ ਚਾਹੀਦਾ ਤਾਂ ਮਰਨ ਹੋਣੀ ਚਾਹੀਦੀ ਸ਼ਾਂਤੀ ਹੁੰਦੀ ਨੇ ਸ਼ਾਂਤੀ ਇਹਨਾਂ ਨੂੰ ਸ਼ਾਂਤ ਕਿਉਂ ਕਰਦਾ ਹੈ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚੰਡਿਆ ਫਲ ਪਾਏ ਆਹ ਵਾਹ ਵਾਹ ਗੁਰਸਖੀਏ ਨਿਤ ਕਰੇ ਜਿਹੜੇ ਵਾਹ ਵਾਹ ਨਿਤ ਕਰਦੇ ਨੇ ਮਨ ਚੰਡਿਆ ਨੇ ਉਹ ਜਿਹੜੇ ਵਾਹ ਵਾਹ ਅਨੰਤ ਕਰਦੇ ਨੇ ਤਾਂ ਹੀ ਕਰਦੇ ਨੇ ਉਹ ਇਹਦੇ ਉਲਟੇ ਅਰਥ ਲਾ ਕੇ ਕੀ ਉਹਨਾਂ ਦੇ ਮਨ ਦੇ ਵਿੱਚ ਸਭਾ ਦੀ ਇੱਛਾ ਹੈ ਜਿਹੜੇ ਮਨ ਚੰਡਿਆ ਫਲ ਲੈ ਉਹ ਹੀ ਅਰਦਾਸ ਕਰਦੇ ਨੇ ਉਹ ਤਾਂ ਸਾਰੇ ਵਿਖਿਆ ਦੇ ਦੇ ਫੋੜ ਜਦੋਂ ਦਾਸ ਕਰਦੇ ਨੇ ਵੈਰੂ ਗਏ ਤੂੰ ਜੋ ਬਾਦ ਹੋਈ ਉਹਨਾਂ ਦੇ ਮਨ ਜਿੰਦੇ ਫੜ ਲੈ ਫਿਰ ਉਹ ਬਾਣ ਮੁਖੀ ਨਾ ਉਹ ਲੋਭ ਦੀ ਪ੍ਰਾਪਤੀ ਵਾਹ ਵਾਹ ਕਰੇ ਸੇਜਨ ਸੋਹਣੇ ਹਰ ਤਿੰਨ ਕੈ ਸੰਗੀ ਮਿਲਾਏ ਕਰਦੇ ਨੇ ਉਹ ਨਰ ਸੋਹਣੇ ਠੀਕ ਹੈ ਸੋਹਣੇ ਸੋਹਣੇ ਉਹ ਰਾਜੇ ਦਾ ਬਿਹਾਰ ਕਾਰ ਬਿਹਾਰ ਸਾਰੇ ਸੰਸਾਰ ਨਾਲ ਸੋਹਣਾ ਜਿਹਨੂੰ ਕੋਲ ਸੰਸਾਰ ਜੱਦਾ ਕਹਿੰਦਾ ਉਹ ਸੋਹਣਾ ਉਹਨੂੰ ਤਾਂ ਆਪਣਾ ਕੋ ਸੋਹਣਾ ਲੱਗਦਾ ਹੀ ਹੁੰਦਾ ਆਪਣੇ ਨੂੰ ਤਾਂ ਆਪਣਾ ਸੋਹਣਾ ਲੱਗਦਾ ਹੀ ਹੁੰਦਾ ਚੱਕਰ ਨੂੰ ਸਖ ਸੋਹਣਾ ਲੱਗੂਗਾ ਮੁਸਲਮਾਨ ਨੂੰ ਮੁਸਲਮਾਨ ਸੋਹਣਾ ਲੱਗੂਗਾ ਗਾਂ ਦੇ ਤਾਰੇ ਜਿਕੇ ਲੱਗੇ ਜਿੱਦੋਸਾਨੀ ਨੂੰ ਹਿੱਦੋਸਾਨੀ ਸੋਹਣਾ ਲੱਗੂਗਾ ਅੰਰੇਜ ਨੂੰ ਅਰੇ ਸੋਹਣਾ ਲੱਗੂਗੀ ਉਰਪੀ ਸੋਹਣਾ ਇਹ ਲਾਭ ਜਿਹੜਾ ਵਰਤਿਆ ਸਾਰੇ ਸੰਸਾਰ ਵਾਸਤੇ ਵਰਤਿਆ ਠੀਕ ਹੈ ਜੀ ਉਹ ਸੋਹਣੇ ਕੌਣ ਜਿਹਦਾ ਨਾ ਕੋਈ ਪੈਰੀ ਨਾ ਹੈ ਵਰਨਾ ਜੇ ਰਾਣ ਨੂੰ ਸੋਹਣਾ ਕਹਿੰਦੇ ਨੇ ਨਾ ਅਜਿਹਾ ਲੋਕ ਐਸਾ ਸਮਝਣਾ ਨੇ ਐਸਾ ਸੋਹਣੀ ਦੀ ਗੱਲ ਕੀਤੀ ਇੱਥੇ ਐਕਟਰ ਐ ਡਾਇਰੈਕਟਰ ਗੱਲ ਨਹੀਂ ਕੀਤੀ ਜਿਨ੍ਹਾਂ ਦੀ ਫੋਟੋ ਫਾਈ ਹੋਈਆਂ ਨੇ ਉੱਥੇ ਬਜਾਰ ਦੀ ਬਗਦੀਆਂ ਉਹ ਗੱਲ ਨਹੀਂ ਹੈ ਠੀਕ ਹੈ ਜੀ ਹਰ ਤਿੰਨ ਕੇ ਸੰਗੀ ਮਿਲਾਏ ਥਾਰ ਕੀ ਕਰਦਾ ਉਹ ਧੀਰੇ ਨਾਲ ਉਹ ਵਿਛੜੇ ਹੁੰਦੇ ਨੇ ਉਹਨੂੰ ਬੁਲਾ ਦਿੰਦੇ। ਉਹ ਨਾਲ ਦਾ ਸੁਖੀ ਜਿਹੜਾ ਹੁੰਦਾ। ਹਾਂ ਉਹਨਾਂ ਨੂੰ ਬੇਲ ਦੇ। ਠੀਕ ਹੈ ਜੀ। ਹਰ ਤੇ ਕਿਹ ਕਹਿੰਦਾ? ਬੁਲਾਇ। ਉਹ ਵਾਹ ਵਾਹ ਹਿਰਦੇ ਨਾਨਕ ਵਾਹ ਵਾਹ ਜੋ ਕਰੈ ਹਉ ਤਨ ਮਨ ਤਿਨ ਕੋ ਹਿਰਦੇ ਉੱਤਰ। ਜੱਦੈ ਜੋ ਨਾ ਫਿਰ ਹਿਰਦੇ ਦੀਓ। ਹਾਂਜੀ ਖੇਜ਼ੇ ਜੇ ਉੱਤੇ ਰੇ ਬਾਵਾ ਨਿਕਲੇ ਅਦਰੋਂ ਬਾਵਾ ਨਿਕਲੇ ਇਹਨਾਂ ਉਹ ਕਹੇ ਨੂੰ ਦੋ ਗਲੋ ਦੁੱਧ ਲੈ ਆਇਆ ਤੁਸੀਂ ਕਹਿੰਦਾ ਉਹਦੇ ਥੱਲੇ ਦੋਤੇ ਲਾ ਬਾਵਾ ਜੀ ਹੁਣ ਉੱਠਿਆ ਢਾਰ ਕੱਢ ਕੇ ਬਾਵਾ ਉਹ ਵਾਲਟੀ ਬਾਵਾ ਜੀ ਨੂੰ ਫੜਾਤੀ ਕਾਂ ਦੋਰਤੀ ਕਾਂ ਜੇ ਆਪ ਦੋਤੂ ਵੀ ਵਾਵਾ ਜੀ ਦੇ ਘਰ ਤੋਂ ਤਾਂ ਜਾ ਕੇ ਦਵੇ ਅਜੇ ਹਲਤੇ ਜੋ ਨਹੀਂ ਉੱਤਰਦਾ ਤਾਂ ਬਗਾਨਾ ਬਾਹਰ ਨਹੀਂ ਉੱਦਦਾ ਨਿਕਲਦਾ ਹੋਸ ਤਰੋਂ ਪ੍ਰਭ ਕਾ ਮੈਂ ਇਸ ਕਾ ਬਿਸਰਾਮ ਉਹ ਧੜਕਾ ਰੋੜੀ ਰੇਲੋਂ ਪੜਨ ਠੀਕ ਹੈ ਜੀ ਵਾਵਾ ਹਿਰਦੇ ਉਚਰਾ ਮੁਖੋਂ ਵੀ ਵਾਵਾ ਕਰਿਓ ਉਹ ਦੇਖੋ ਬੁਖੋ ਬਾਝ ਉਚਰਾ ਉਹ ਖੁਦੇ ਵਾਹਵਾ ਕਰਿਓ ਬੁਖੋ ਕਿਉਂ ਕਰਾਂ ਕੋਈ ਹੋਰ ਸੁਲਬ ਜੇ ਜੇ ਚੇਟ ਬਹੁਤ ਨੂੰ ਲੱਗ ਦੇ ਕੰਨ ਚ ਪੈ ਜਵੇ ਠੀਕ ਕਰਿਓ ਨਾਨਕ ਵਾਹ ਵਾਹ ਜੋ ਕਰੈ ਹਉ ਨਾਰਕ ਬਹਾਵਾ ਜੋ ਕਰਨ ਇਹ ਜਿਹੜੇ ਬਹਾਵਾ ਕਰਦੇ ਨੇ ਉਹ ਤਨ ਬਣ ਤਰ ਕੋ ਦੇ ਹੂੰ ਆਪਾਂ ਸਭ ਕੁਝ ਹਉ ਦੇਣ ਨੂੰ ਗੁਰੂ ਦਾਇਆ ਕਹਿੰਦਾ ਚੱਕ ਕੀ ਕਰਦਾ ਗੋਲਕ ਲੈ ਲਵਾਂਗੇ ਹਾਂਜੀ ਮਹੱਲਾ ਤੀਜਾ ਵਾਵਾ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਜਿਨ ਸੇਵਿਆ ਤਿਨ ਫਲ ਪਾਇਆ ਹਉ ਤਿਨ ਬਲਹਾਰੇ ਜਾਉ ਵਾਹ ਵਾਹ ਸਾਇਬ ਸੱਚ ਹੈ ਜੀ ਜੀ ਸਾਇਬ ਜੀ ਉਹ ਤਾਂ ਸੱਚਾ ਸੱਚ ਹਮੇਸ਼ਾ ਰਹਿਣ ਵਾਲਾ ਹੁੰਦਾ ਉਹਦਾ ਉਪਰਾਨਾ ਨਹੀਂ ਹੁੰਦਾ ਉਹਦੀ ਬਦਲਾ ਨਹੀਂ ਹੁੰਦਾ ਉਹ ਜੰਮਦਾ ਮਰਦਾ ਨਹੀਂ ਹੈ ਉਹਦਾ ਕੋਈ ਮਾਪਾਪ ਨਹੀਂ ਹੁੰਦਾ ਤੇ ਸੱਚ ਹੈ ਵਾਲਾ ਵਾਹ ਵਾਹ ਸਾਇਬ ਹੈ ਅੰਮ੍ਰਿਤ ਜਾ ਕਾ ਨਾਮ ਉਹਦਾ ਗਿਆਨ ਹੈ ਪਰ ਸਾਜੇ ਗਿਆਨ ਜੀ ਨੇ ਸੋਨੇ ਜਿਹਾ ਆਦੂ ਸੋਪੀਦਿਆ ਪੀ ਲਿਆ ਕੰਨਾਂ ਨਹੀਂ ਪੀ ਹੁੰਦਾ ਗਿਆਨ ਹੈ ਅੱਛਾ ਫਿਰ ਸਰਬਲੀ ਖੀਰ ਪਿਆ ਇਹਦਾ ਦੁੱਧ ਹੈ ਨਾ ਗਿਆਨ ਦਾ ਇਹ ਕੰਨਾਂ ਨਹੀਂ ਪੀ ਹੁੰਦਾ ਮੂੰਹ ਦੁੱਧ ਪੀ ਹੁੰਦਾ ਉਹੀ ਤਾਂ ਵਿਖ ਕੰਨਾਂ ਦੇ ਪੀਤਾ ਹੋਇਆ ਅਮਰ ਥੱਲੇ ਤੱਕ ਇਹ ਮੂੰਹ ਜਾਵਾਂ ਨਾ ਥੱਲੇ ਨੂੰ ਲੈ ਜਾਂਦੇ ਕਦੇ ਵਾਲ ਨੂੰ ਕਰਦੇ ਤੇ ਜੇ ਨੂੰ ਕਰਦੇ ਨਾ ਵੀ ਦੇਖ ਲਵੇ ਹੈ ਜੀ ਹੁੰਦੀ ਹੈ ਠੀਕ ਹੈ ਜੇ ਆਦਮੀ ਜੀ ਬਦਬੂ ਆਉਂਦਾ ਉਹ ਤੇ ਜੀ ਬਾਹਰ ਨੂੰ ਘੱਡੂਗਾ ਬਦਬੂ ਉਹ ਵਿੱਚ ਕਹਿੰਗੇ ਕਿ ਆਸੀ ਖੁਸ਼ਬੂਦਾਰ ਦੇਗਾ ਬਦਬੂਦਾਰ ਹਾਂ ਅਮਰਤ ਜਾ ਕੇ ਨਾਮ ਅਮਰਤ ਜਾ ਕੇ ਗਿਆਨ ਹੈ ਬਿਰਤਾ ਅਮਰ ਕਰਦਦਾ ਉਹਦਾ ਤਾਂ ਗਿਆਨ ਜੇ ਸਮਝ ਆਇਆ ਜਿੰਨ ਅਮਰ ਹੋ ਗਿਆ ਜਿਉਣ ਵਾਂਗ ਕਟਿਆ ਗਿਆ ਉਹਦਾ ਠੀਕ ਹੈ ਜੀ ਜਿਨ ਸੇਵਿਆ ਤਿੰਨ ਫਲ ਪਾਇਆ ਹੋ ਤਿੰਨ ਬਲ ਹਾਰੇ ਚੱਲ ਪਿਆ ਫਲ ਵੀ ਪਾਲਿਆ ਉਹ ਤਿੰਨ ਬਲ ਹਾਰੇ ਜਾਉ ਉਹਨਾਂ ਦੇ ਜੀ ਵਾ ਵਾ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾ ਵਾ ਜਲ ਥਲ ਭਰਪੂਰ ਹੈ ਗੁਰਮੁਖੀ ਪਾਇਆ ਜਾਏ ਵਾ ਵਾ ਗੁਰੀ ਦਾ ਹੈ ਵਾ ਵਾ ਕੋਣ ਗੁਰੀ ਦਾ ਸਾਹਿਬ ਗੁਰੀ ਦਾ ਕੀ ਆਂ ਜੀ ਸਾਹਿਬੇ ਹਾਂ ਦਾ ਉਹ ਗੋਆਂਢੀ ਨਾ ਨਾਣਾ ਗੋਣਾ ਦਾ ਖਜ਼ਾਨਾ ਉਹ ਗੰਨਿਆ ਉਹ ਜੋਨੇ ਕੋਲ ਜਿਸ ਨੂੰ ਦੇ ਤੋ ਖਾਈ ਖਜ਼ਾਨਾ ਭਾਈ ਜਿਹੜਾ ਜਿੰਨੂੰ ਦਊ ਉਹੀ ਖਾਊਗਾ ਖਜ਼ਾਨਾ ਦੋਦੇ ਕੋਲ ਸਭ ਨਾਲ ਹਾਂ 10 ਅਸਤ ਸਦਾ ਹਾਂ ਠਾਕੁਰ ਧਰਿਆ ਹਾਰਬ ਦੇ ਹੱਥ ਦੀ ਥਲੀ ਦੇ ਰੱਖੇ ਨੇ ਸਾਰੇ ਵਿਜਾਂਦ ਦੇ ਸਾਰੇ ਨਾਮ ਦਾ ਜਿਹਨਾਂ ਆਹ ਕ ਪਲ ਜਿਹਨੂੰ ਦਿੰਦਾ ਖਾ ਸਕਦਾ। ਹਾਂਜੀ। ਵਾਹ ਵਾਹ ਜਲ-ਥਲ ਭਰਪੂਰ ਹੈ ਗੁਰਮੁਖੀ ਪਾਇਆ ਜਾਏ। ਆ ਦੇਖੋ ਵਾਹ ਵਾਹ ਕੀ ਹੈ ਜਲ-ਥਲ ਭਰਪੂਰ ਹੈ। ਜਾਲਕ ਥਲ ਸਾਰੇ ਸਰਬ ਵਿਅਕਤੀ ਆ ਉਹ ਬਹੁਤ ਕਰਦੇ ਆ ਉਹ ਕੀ ਹੁਕਮ ਯੱਗਲ ਪਰਕੂਰ ਹੈ ਹੁਕਮ ਆ ਉਹ ਭੈਰ ਚੱਲੇ ਨਖਰੇ ਆ ਉਹ ਭੈਰ ਚੰਗਣੇ ਦਾ ਭਾਰ ਭੈਰ ਤਕਤੀ ਦੱਬੀ ਚੰਦ ਉਹ ਆ ਗੁਰਮੁਖ ਸਮਝ ਸਕਦਾ ਲੱਗਦੀ ਇਹ ਗੱਲ ਕੁਝ ਠੀਕ ਜੰਮਦੀ ਨਹੀਂ ਗੱਲ ਠੀਕ ਰਾਇਆਂ ਸਾਹਿਬ ਜੀ ਨੇ ਕਿਹਾ ਆਇਆ ਜਦ ਮੁਖਤਾ ਇਹ ਕੋ ਹੋਗਾ ਵੀ ਲੈ ਕੇ ਆਇਆ ਜਿੰਦਾ ਆਪ ਕੋ ਕੰਮ ਨਹੀਂ ਦੀ ਗੱਲਾਂ ਹੈ ਜੀ ਗਾ ਹੈ ਜੀ ਤਾਂ ਕੋਈ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਵਾ ਭਾਵ ਹੈ ਉਹ ਗੁਰਸਿੱਖੋ ਵਾਹ-ਵਾਹ ਕਰੋ ਤੁਸੀਂ ਜਦ ਗੁਰਬਾਣੀ ਗਾਓ ਪ੍ਰੇਮ ਨਾਲ ਇੱਕ ਵਾਂ ਇੱਕ ਜਿਤ ਹੋ ਕੇ ਗੁਰਬਾਣੀ ਵਿਚਾਰੋ ਦਿੱਤ ਕਿਉਂਕਿ ਕਰਤੇ ਪੁਰਖ ਨੂੰ ਇਹੀ ਚੰਗੀ ਲੱਗਦੀ ਹੈ ਇਹ ਕੰਤ ਸਾਰਿਆਂ ਨੂੰ ਚੰਗਾ ਲੱਗਦਾ ਕਰਤੇ ਪੁਰਖ ਨੂੰ ਹੁੰਦਾ ਕੰਮ ਬਾਕੀ ਕੋਈ ਕੰਮ ਘੱਟ ਕਰ ਲੋ ਵੱਧ ਕਰ ਲੋ ਉਹਦਾ ਜੀ ਬਹੁਤਾ ਫਿਰਕ ਫਿਰਦਾ ਵੱਧ ਦੇ ਦੇਣਾ ਜ਼ਰੂਰੀ ਲੋੜੀ ਹੈ ਵੱਧ ਵਿੱਚੋਂ ਵੱਧ ਹੋਣਾ ਤੇ ਧਿਆਨ ਹੋਰੀਆਂ ਬਤਾਉਂਦੇ ਨੇ ਅੱਜ ਗਰੇਵੀਆਂ ਦੋ ਰਾਜ ਨੂੰ ਸੁਣ ਲਈਆਂ ਭੈਣ ਲੋਏ ਬਿਕ ਗੁਰ ਪੂਰੀ ਗਿਆ ਠੀਕ ਹੈ ਜੀ ਹਾਂਜੀ ਗੁਰ ਵਾਹ ਵਾਹ ਭਾਵੇ ਗੁਰ ਨੂੰ ਵਾਹ ਵਾਹ ਚੱਕੀ ਕਰੋ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾਨਕ ਵਾਹ ਵਾਹ ਮਨ ਚਿਤ ਕਰੇ ਜੇ ਮਨ ਅਰਚਿਤ ਵਾਹ ਵਾਹ ਕਰਦ ਤੇ ਗਾਉ ਕੰਕਲ ਨੇੜਾ ਆਵਾ ਉਹਦੇ ਮੋਤ ਨੇੜੇ ਵੀ ਨਹੀਂ ਆ ਸਕਦੀ ਔਰ ਉਹਦੇ ਨੇੜੇ ਵੀ ਛੂਹ ਨਹੀਂ ਸਕਦੀ ਉਧਰੋਂ ਮੂੰਹ ਹੀ ਨਹੀਂ ਕਰਦਾ ਜਦ ਉਹ ਚਲਾ ਜਾਏ ਤੇਰੀ ਵੀ ਪੇਸ਼ੀ ਕਰੀਉ ਮੇਰੀ ਵੀ ਪੇਸ਼ੀ ਬਣੀ ਛੜਕਾਰਾ ਉੱखा ਹੋ ਠੀਕ ਹੈ ਜੀ ਪੌੜੀ ਹਰ ਜੀ ਉਹ ਸੱਚਾ की गुरबानी सतगुरु ते सच सहज समान हां जी ओ सच्चा सच है सच्ची गुरबानी गुरबानी जी ओ है जेला है सच है और उदी गुरबानी है जेडी है भी सच्ची ठीक है जो बोलदा वो गुरबानी हुंदी है ਹਰ ਜੀਓ ਜਿਹੜਾ ਆਦਮੀ ਉਹਦੀ ਗੱਲ ਹੈ ਅੱਛਾ ਜੀ ਆਦਮੀ ਦੀ ਗੱਲ ਆ ਗਈ ਇੱਥੇ ਹਰ ਆਦਿਓ ਦੋ ਆ ਗਏ ਗੁਰ ਸੱਜਾ ਅੰਦਲੌਰ ਸੱਚ ਹੈ ਦੋਏ ਬੋਲਦੇ ਨੇ ਗੁਰਬਾਣੀ ਤਾਂ ਸੱਚੀ ਤੋਏ ਕਸੂਰ ਚ ਬੋਲਦੇ ਨੇ ਫਿਰ ਠੀਕ ਹੈ ਜੀ ਸੋਲਦੀ ਪਾੜਦੀ ਇਹਨਾਂ ਦੀ ਠੀਕ ਹੈ ਹਰ ਸੱਚਾ ਤੇ ਜੀਓ ਸੱਚਾ ਉਸ ਸਮੇਂ ਦੀ ਗੱਲ ਹੈ ਜੀ ਜੀ ਉਹ ਸੱਚਾ ਹੈ ਸੱਚਾ ਠੀਕ ਹੈ ਉਹ ਸੱਚ ਹੈ ਸੱਚ ਮੁਕਤ ਹੈ ਬਾਹਦੇ ਕਰਕੇ ਲੱਗਿਆ ਹੋਇਆ ਠੀਕ ਹੈ ਹਰ ਜੀ ਉਹ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਗੁਰ ਤੇ ਸੱਚ ਪਛਾਣੀ ਐ ਸੱਚ ਸਹਿਜ ਸਮਾਣੀ ਜੀ ਸੱਚੀ ਜਾਣਦੇ ਨਹੀਂ ਕਿਸੇ ਜੀ ਹਰ ਜੀ ਉਹ ਤੇ ਜਾਣ ਲੋ ਸਤਗੁਰ ਤੇ ਜਾਣ ਲੋ ਸਤੁੱਤੇ ਸੱਚ ਪਛਾਣੀਐ ਸੱਚ ਸਹਿਜ ਸਮਾਨ ਜੇ ਸੱਚ ਪਛਾਣਨਾ ਆ ਜਾਣਨਾ ਹੈ ਤਾਂ ਗੁਰੂਖਤੇ ਜਿਸ ਦੇ ਪਛਾਣ ਲੋ ਜਾ ਕੇ ਇਹੀ ਚੈਲੰਜ ਕੀਤਾ ਸੀ ਸਿੱਧਾ ਨੂੰ ਦਾਣਕ ਮੈਨੂੰ ਕੋਈ ਅਲੱਗ ਜਿਹੀ ਕਿਸੇ ਸੰਤ ਤੋਂ ਠੀਕ ਹੈ ਬਸ ਦਾਣਕ ਸੰਤ ਮਿਲੈ ਸੱਚ ਪਾਈਐ ਕਿਉਂਕਿ ਕੋ ਸੱਚ ਸੰਤ ਦੀ ਕਿ ਅੱਜ ਵੀ ਇਹੀ ਇਹਨਾਂ ਸੰਤਾਂ ਨੂੰ ਇਹ ਆ ਤੇ ਸਤਰੀ ਹੈ ਠੀਕ ਹੈ ਤੇ ਲਿਖਿਆ ਸਤ ਗੁਰ ਤੇ ਸੱਚ ਪਛਾਣੀਐ ਸੱਚੀ ਸਹਜੇ ਸਮਾਨ ਹਦੂ ਉਸ ਤੇ ਸੱਚ ਪਛਾਣੀ ਹਾਂ ਸੁਖੀ ਜੀ ਨੂੰ ਸਤ ਗੁਰ ਤੇ ਪਛਾਣੇ ਜਾਊਗਾ ਠੀਕ ਵੀ ਸੱਚ ਦੁੱਖ ਤਾਂ ਪਛਾਣ ਕੀ ਹੈ ਦੱਸਦੇ ਸੱਚ ਸਹਜ ਸੁਬੋੜੀ ਸੱਚ ਦੇ ਵਿੱਚ ਸਹਜ ਠਿਕਾ ਹੋਈ ਉਸ ਤੋਂ ਵਿੱਚ ਹੁੰਦਾ ਸੱਚ ਵਿੱਚ ਇਹਨੂੰ ਸੱਚ ਨਹੀਂ ਪਛਾਣ ਆ ਜਾਂਦੀ ਐ ਮਨ ਦੇ ਕੇ ਸੱਚ ਦੇ ਵਿੱਚ ਜਾਂਦਾ ਠੀਕ ਹੈ ਜੀ ਅੰਨ ਜਾਗਤ ਰਹਿਣ ਬਿਨਾਂ ਪੰਥਨ ਜਾਗੈ ਫੇ ਜਾਗਦੇ ਹੀ ਰਹੇ ਨੇ ਫੇ ਕਹਿੰਦਾ ਰੋ ਮੈਂ ਨੇ ਫੇ ਤੂੰ ਮਾਇਆ ਵਕਤ ਅਧਿਆਨ ਮਾਇਆ ਦੀ ਦੌੜ ਤੇ ਅਲ ਦਿੰਦੇ ਠੀਕ ਹੈ ਜੀ ਦਾ ਮਤਲਬ ਸੁਣਦੇ ਨੇ ਜਿਹੜੇ ਮਾਇਆ ਦੀ ਦੌੜ ਚ ਨੇ ਜਿਹੜੇ ਜਾਗਦੇ ਨੇ ਉਹ ਸੱਚੇ ਨੇ ਜਿਹੜੇ ਠੀਕ ਹੈ ਸੱਚ ਦੀ ਦੌੜ ਕਿੱਦੇ ਹੋ ਸ਼ਬਦ ਵਿਚਾਰ ਚ ਲੱਗੇ ਨੇ ਨਾ ਸਵਾਂ ਵੰਦਨ ਕਰਕੇ ਜਾਗਦੇ ਰਹਿੰਦੇ ਸਾਰੀ ਜ਼ਿੰਦਗੀ ਜਾਗਦੇ ਰਹਿੰਦੇ ਸਾਰੀ ਜ਼ਿੰਦਗੀ ਸ਼ਬਦ ਵਿਚਾਰ ਕਰਦੇ ਰਹਿੰਦੇ ਠੀਕ ਹੈ ਜੀ ਗੁਰਮਤਿ ਹਰ ਰਸ ਸੇ ਪੁੰਨ ਪ੍ਰਾਣੀ ਗੁਰਮਤਿ ਯਾਰਾ ਚਾਖਿਆ ਗੁਰਮਤਿ ਜਿਹੜੀ ਨਾ ਜਿਹੇ ਹੋਰ ਆਏ ਨੂੰ ਸੁਭਿਖਾ ਯਾਦਾ ਚਾਖਿਆ ਮਨ ਲਪੋਤਾ ਪਰਾਂਹ ਕੁਪਰਾਨੀ ਕਾਲ ਦੇ ਉਹ ਉਹੀ ਪੁਰਾਣੀ ਦੇ ਪੁੱਧੀ ਦੇ ਉਹ ਕੱਲ ਮੈਂ ਉਹ ਪੁਰਨ ਗੋਬੇ ਨਿ ਜਾਏ ਉਹਨੇ ਗੋਬੇ ਬੰਗੋਣਾ ਉਹ ਕੋ ਪੁਰਨਾ ਨਹੀਂ ਉਹ ਬਾਮਾ ਵਾਲਾ ਕੋਲ ਜਿਆਹ ਕਰਤੀ ਜਿਆਹ ਮਾਇਆ ਹਾਂਜੀ ਅੱਜ ਦੇਖਿਆ ਪੁਰਨ ਗੀਤੀ ਉਹਨੇ ਦੇਖਿਆ ਪੁਰਨ ਕਰਤੀ ਸਾਗੇ ਵਰਜੂਗਾ ਜਿਹੜਾ ਆਵਾਜਾ ਨਾ ਗੁਰਦਾਰੇ ਦਾ ਵਿਗਿਆ ਪੁਰਨਾ ਸਾਰੇ ਮੱਦੀ ਜਾਂ ਮੈਨੇ ਖਾ ਕੇ ਕੋੜ ਫੈਲਿਆ ਪਿਆ ਕੋੜ ਹਾਂਜੀ ਹਾਂ ਪਿੰਗੁਰ ਕਿਨੇ ਨਾ ਪਾਇਓ ਪਚਮੂਏ ਅਜਾਣੀ ਫਿਰ ਗੁਰਦਿਰ ਨਾ ਬਥੇਰੇ ਪ੍ਰਾਣੀ ਮਾਰਾ ਫੇਰ ਫੇਰ ਕੇ ਸੁਬਾਧੀਆਂ ਲਾ ਲਾ ਕੇ ਜਲਦਾ ਹੈ ਘੜ ਘੜ ਹੋਰ ਬਾਲ ਸਾਰੇ ਸਾਧਨ ਤਰ ਕਰਕੇ ਕਿਸੇ ਨੇ ਗੰਦਾ ਦੇ ਜਿਹੜੇ ਲਾ ਤੇ ਤੇ ਪੁਸ਼ ਕਰਤਾ ਪੱਜੂਏ ਪਰਾਂ ਦੀ ਜਿਹੜੇ ਪਰਾਂ ਦੀ ਪੱਛ ਕੇ ਮਰ ਕੇ ਅਣਜਾਣ ਤੇ ਬਰਦੀ ਬੜਿਆ ਅਣਜਾਣ ਬੜੇ ਚ ਅਣਜਾਣ ਬੜੇ ਚ ਧੁਰਤੀ ਕਰਦੇ ਰਹੇ ਪੱਛ ਮਰ ਕੇ ਵਿਚਾਰੇ ਠੀਕ ਹੈ ਜੀ ਰਹੀ ਸੀ ਕਿਆ ਜੀ ਬੜਿਆ